श्लोक महान या वाहवा बाण सार है तिस जीवड अवर ना कोई है वाहवा सच्चा सोई वाहवा होगी वाच लेगी तू वाहवा पैदा होया है जेडी हो है, है।, है ना ਹਾਂਜੀ ਜਿਹੜੀ ਬਿਨਾ ਕਰਨਾ ਤੇ ਸੁਣੀਏ ਤੁਰਕੀ ਬਾਣੀ ਉਹਨੂੰ ਹਰ ਦੇ ਵਾ ਵਾ ਕੀਤਾ ਬਾਣੀ ਨਿਆਕਾਰ ਹੈ ਜੋਤਾਰ ਹੈ ਉਹ ਦੇ ਵਰਗਾਰ ਦੇ ਨਹੀਂ ਆ ਸਕਦੀ ਕੰਨਾਂ ਤੇ ਵੀ ਪਰੇ ਆੱਖਾਂ ਤੇ ਵੀ ਪਰੇ ਹਨਾਂ ਦੀ ਪਕੜ ਤੇ ਵੀ ਪਰੇ ਹੈ ਬਿਨ ਕੰਨ ਅੱਖਾਂ ਵਾਜੂ ਦੇਖਣਾ ਉਹ ਬਾਣੀ ਬਾਣੀ ਕਹਿੰਦੇ ਨੇ اے وو وو کی ہے قربانی ہے وو وو بھلیں ننگار ہے بھلیں ننگار ہے قربانی ننگار کرتے ہیں تاخر نہ ویڈیو فوٹو لے لو تے پیپر ਠੀਕ ਹੈ ਕੋਈ ਸੋਇਦਾ ਐਸਾ ਸਟੂਪ ਨਹੀਂ ਜਿਹਦੀ ਪਕੜ ਚ ਆ ਜਵੇ ਹੋ ਠੀਕ ਹੈ ਜੀ ਤਾਂ ਹੀ ਬਾਣੀ ਲਿਖਿਆ ਹੈ ਨਾ ਜੀ ਗੁਰਬਾਣੀ ਨਹੀਂ ਲਿਖਿਆ ਹਾਂ ਬਾਣੀ ਲਿਖਿਆ ਹੈ ਤੇ ਉਹ ਜੇ ਤਾਂ ਉਹ ਬਾਣੀ ਕੀਆ ਬਾਣੀ ਹੀ ਹੁਕਮ ਹੈ ਹੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਉਪਰ ਸਾਰੇ ਉਹਦੇ ਜੇ ਲੱਸੀ ਨਹੀਂ ਹੁੰਦੀ ਗੁਰਬਾਣੀ ਚ ਲੱਸੀ ਹੁੰਦੀ ਹੈ ਗੁਰਬਾਣੀ ਕਹੇ ਜੋ ਕਹਿ ਰਹੀ ਹੈ ਗੁਰਬਾਣੀ ਹੈ बोल ਰਹੀ ਹੈ ਛੇਪ ਕੇ ਜਲ ਮੰਨਦਾ ਛੇਪ ਕੇ ਜਲ ਫੇਰੇ ਨੂੰ ਦੇ ਸਾਧ ਸੰਪਰਕ ਗੁਰਬਾਣੀ ਨਾਲ ਜੋ ਬਾਣੀ ਨਾਲ ਸੰਪਰਕ ਸਾਡਾ ਨਹੀਂ ਹੈ ਬਿਲਕੁਲ ਵੀ ਬਾਣੀ ਨਾਲ ਸੰਪਰਕ ਉਹਨਾਂ ਦਾ ਸੀ ਜਿਨ੍ਹਾਂ ਨੇ ਬੋਲੀ ਹੈ ਲਿਖੀ ਹੈ ਸਾਡਾ ਜੋ ਗੁਰਬਾਣੀ ਨਾਲ ਸੰਪਰਕ ਨੋਤੇ ਗੁਰ আর ਬਾਣੀ ਦੋ ਅੱਖਰ ਹੈ ਜੋ ਗੁਰ ਨੇ ਕਹੀ ਹੈ ਬਾਣੀ ਉਹ ਅਸੀਂ ਮੰਨਣੀ ਹੈ ਉਹ ਤੋਂ ਫਿਰ ਗੁਰੂ ਤੱਕ ਪਹੁੰਚ ਜਾਓ ਜੇ ਉਹ ਆਣਾਂ ਨਹੀਂ ਮੰਨਦੇ ਤਾਂ ਆਹ ਤੇ ਜਾਣ ਠੀਕ ਹੈ ਜੀ ਗੱਲ ਹੀ ਉਹਨੇ ਹਾਂ ਵਾ ਵਾ ਅਗਮਾ ਹੈ ਵਾ ਵਾ ਸੱਚਾ ਸੋਈ ਵਾ ਵਾ ਕੀ ਇਹ ਅਗਮਾ ਥਾ ਹੈ ਅਗਾਂ ਬੁੱਧੀ ਤੇ ਬਰੇ ਥਾ ਹੈ ਉਦੀ ਥਾਏ ਕੋਈ ਨਹੀਂ ਵਾਹ ਵਾਹ ਸੱਚਾ ਸੋਈ ਵਾਹ ਵਾਹ ਸੱਚਾ ਸੋਈ ਉਹ ਸੱਚਾ ਆਪਈ ਹੈ ਸੱਚੇ ਬਾਰੇ ਜੋ ਦੱਸਿਆ ਉਹ ਗਿਆਨ ਹੈ ਸੱਚ ਦਾ ਕਰਾਇਆ ਬਾਰੇ ਕੁਝ ਮਾੜਾ ਮੋਟਾ ਆਤਾ ਪਤਾ ਦੱਸਿਆ ਮਾੜਾ ਮੋਟਾ ਉਹਦਾ ਦੱਸਿਆ ਠੀਕ ਹੈ ਜੀ ਵਾਹ ਵਾਹ ਵੇ ਹੈ ਵਾਹ ਵਾਹ ਕਰੇ ਸੋ ਹੋਈ ਵਾਹ ਵਾਹ ਵੇ ਹੈ ਵਾਹ ਵਾਹ ਉਹ ਹੈ ਉਸ ਵਾਵਾ ਕਰੇ ਜੋ ਹੋਈ ਹਾਂਜੀ ਵਾਵਾ ਜੋ ਕਰਦਾ ਕੋਈ ਹੁੰਦਾ ਵਾਵਾ ਕਰੇ ਜੋ ਹੋਈ ਵਾਵਾ ਜੋ ਕਰਦਾ ਹੁਕਮ ਜੋ ਕਰਦਾ ਉਹੀ ਹੁੰਦਾ ਅੱਛਾ ਜੀ ਵਾਵਾ ਅੰਮ੍ਰਿਤ ਨਾਮ ਹੈ ਗੁਰਮੁਖੀ ਪਾਵੇ ਕੋਈ ਵਾਵਾ ਅਬ੍ਰਿਤ ਨਾਮ ਹੈ ਉਹ ਹੈ ਅਬ੍ਰਿਤ ਨਾਮ ਗੋਵਿੰਦ ਰੱਬ ਦਾ ਨਾਮ ਜਹੀ ਵੇ ਇਸ ਦਾ ਬਿਸਰਾਮ ਅੰਦਰ ਉਹ ਘਟਿਆ ਗੁਰਮੁਖ ਭਾਵੇਂ ਬਾਤ ਮਿਲਦਾ ਇਹ ਗੁਰਬਾਣੀ ਗੁਰਮੁਖ ਬਣਾਉਂਦੀ ਹੈ ਇਹ ਗੁਰਬਾਣੀ ਗੁਰਮੁਖ ਅਵਸਥਾ ਗੁਰਮਖੀ ਅਵਸਥਾ ਤੱਕ ਲੈ ਕੇ ਜਾਂਦੀ ਹੈ ਗੁਰਮਖੀ ਅਵਸਥਾ ਤੋਂ ਬਾਅਦ ਮਿਲਦਾ ਕਿਤੇ ਠੀਕ ਹੈ ਜੀ ਇਹ ਨਾਮ ਗੱਲ ਹੈ ਜੀ ਆਹ ਨਾਮ ਪ੍ਰਦਰਸੀ ਗੱਲ ਹੈ ਜਦ ਕਹਨਾ ਕਾਲ ਦੇ ਯਾਤਰਕ ਨੂੰ ਫਾਵਾ ਪ੍ਰਾਨ ਗਏ ਸਾਗਰ ਮੈਨੇ ਫਤ ਕਾਮਨਾ ਆਵੇ ਇਹ ਉਦੋਂ ਬ੍ਰਦਾ ਗੁਰਮਖੇ ਬੋਲ ਰਿਹਾ ਹੋ ਠੀਕ ਜੀ ਗੁਰਮਖੇ ਬੋਲਦਾ ਗੁਰਬਾਣੀ ਸ਼ਬਦ ਕਿਵੇਂ ਦੱਸ ਹਾਂਜੀ ਵਾ ਵਾ ਕਰਮੀ ਪਾਈਏ ਆਪ ਦਇਆ ਕਰ ਦੇ ਵਾ ਬੋਲਣ ਦੀ ਜਿਹੜੀ ਸਬਰਥਾ ਹੈ ਇਹ ਬੜੀ ਕਿਰਪਾ ਨਾਲ ਦਿਸਦੀ ਹੈ ਨਾ ਮਿਲਿਆ ਪਾਵਾ ਕੋਨੇ ਵਾਹ ਵਾਹ ਕਰਮੀ ਪਾਈ ਐ ਮੈਂ ਹੁਕਮ ਦੀ ਗੱਲ ਨਹੀਂ ਹੋ ਰਹੀ ਹੁਕਮ ਨਹੀਂ ਆਊਗਾ ਵਾਹ ਵਾਹ ਕਰੂਗਾ ਕਿਵੇਂ ਕਿੰਨ ਖਣੇ ਨਹੀਂ ਦੁੱਧ ਕਾਲਾ ਬਣਾ ਦੋਗੇ ਵਾਹ ਵਾਹ ਜਿਹੜੀ ਬਾਣੀ ਆ ਬਖੜ ਗੁਰਬਾਣੀ ਦੁੱਧ ਜਿਹੜੀ ਬਾਣੀ ਆ ਤੁਰਕੀ ਬਾਣੀ ਮੱਖਣ ਐ ਜੇ ਮੱਖਣੇ ਨਹੀਂ ਦੁੱਧ ਬਣਾ ਕੇ ਜੇ ਮੈਂ ਤੁਸੀਂ ਪ੍ਰਥਨਾ ਨਾਲ ਖਾ ਪਾਛਾ ਮੱਖਣ ਮੈਨੂੰਗਾ ਉਹਦਾ ਤੋ ਬਣਾ ਕੇ ਦੇ ਦੂਗਾ ਉਹ ਖੜਾ ਨਹੀਂ ਮਰਿਆ ਦੁੱਧ ਕਾ ਦਾ ਮਾਰ ਕੇ ਦੇ ਕਰਮੀ ਪਾਈਏ ਆਪ ਦਇਆ ਕਰ ਦੇ ਆਪ ਦਇਆ ਜਵੇ ਤਨ ਦਾ ਨਾਨਕ ਵਾ ਵਾ ਪਾਈਏ ਅੰਦਰ ਨਾਨਕ ਵਾ ਵਾ ਹੈ ਇਹਨੇ ਗੁਰਬਾਣੀ ਨੂੰ ਕਤਕ ਕਰਨਾ ਗੁਰਬਾਣੀ ਲਿਖੜੀ ਗੁਰਬਾਣੀ ਵਿਚਾਰਨ ਕਰਦੀ ਵਾ ਵਾ ਹੋ ਹੈ ਅਸਲ ਵਿੱਚ ਗੱਲ ਇਹ ਹੈ ਬਹੁਤ ਬਹੁਤ ਦਾ ਮਤਲਬ ਹੈ ਜਿਹਨੇ ਲਏ ਤੇ ਅੰਦਰ ਦਿਲ ਦਾ ਦੋ ਪ੍ਰਾਪਤੀ ਹੋ ਗਈ ਉਹਦਾ ਨਾਮ ਦਾ ਖਿਆਲ ਨਾ ਵੱਧਈ ਰਹੇ ਠੀਕ ਹੈ ਟੋੜ ਨ ਆਵੇ ਵੱਧ ਹੋ ਜਾਈਂ ਹੌਜੀ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨ ਆਵੇਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀ ਐ ਬਿਨ ਕਰਮੈ ਨਾ ਪਾਇਆ ਜਾਏ ਆਪਣੀ ਗੱਲ ਕਰਕੇ ਸਮਝਾ ਰਏ ਸਾਰਿਆਂ ਨੂੰ ਬੇਰੀ ਅਵਸਥਾ ਇਸ ਵਕਤੇ ਇਹ ਹੈ ਕਿ ਆ ਸਤਪੁਰ ਸੇਵੇ ਸ਼ਾਂਤ ਨਾ ਪਾਈ ਐ ਮੈਨੂੰ ਤਾਂ ਸ਼ਾਂਤੀ ਨਹੀਂ ਪੈ ਰਹੀ ਸਤਗੁਰ ਦੀ ਸੇਵਾ ਮੈਨੂੰ আর ਕਿਸੇ ਨਾਲ ਉਹ ਨਹੀਂ ਪਾਣੀ ਸ਼ਾਂਤੀ ਸਤਗੁਰ ਦੀ ਸੇਵਾਦੋਂ ਇਹ ਵੀ ਧਿਆਨ ਰੱਖਣੇ ਹੁੰਦੇ ਜੇ ਬਰੀ ਲੋੜੀ ਪੈ ਪੈ ਰਹੀ ਤਾਂ ਪਹਿਲੀ ਕਿਸੇ ਨਾਲ ਨਹੀਂ ਦੀ ਸੇਵਾ ਸਫਲ ਹੈ ਉਹ ਸੇਵਾ ਸਫਲ ਹੈ ਜੇ ਕੋ ਕਰੇ ਸਫਲ ਕਾ ਦੀ ਸ਼ਾਂਤੀ ਪ੍ਰਾਪਤ ਹੋ ਕੁਝ ਨਹੀਂ ਜਾਏ ਹੋਰ ਕੋਈ ਜਗਾ ਨੀ ਹੈ ਕੋਈ ਤਰੀਕਾ ਹੈ ਇਹ ਤੇ ਬਿਨਾ ਹੋਰ ਕੋਈ ਤਰੀਕਾ ਹੈ ਜੀ ਇਸ ਕਰਕੇ ਵਾ ਵ ਤੇ ਬਿਨਾ ਪਿਰ ਸਤਗੁਰੂ ਸੇਵੇ ਸਤਗੁਰੂ ਦੇ ਪਾਣੀ ਤੇ ਚੱਲਣ ਤੇ ਬਿਨਾ ਸ਼ੁੱਧੀ ਪ੍ਰਾਪਤ ਨਹੀਂ ਹੋ ਸਕਦੀ ਹੋਰ ਕੋਈ ਜਗਾ ਨਹੀਂ ਜਿੱਥੇ ਸ਼ਾਂਤੀ ਪ੍ਰਾਪਤ ਹੋਵੇ ਜੀ ਮੋਂ ਤੇਰਾ ਲੋਚੀ ਹੈ ਬਿਨ ਕਰਮੈ ਨਾ ਪਾਇਆ ਜਾਏ ਜੇ ਬੋਤੇ ਨਾਲ ਲੋਤੀਏ ਲੋਜਦੇ ਨਾਲ ਰੋਕ ਬਥੇਦੇ ਬਾਹਲਾ ਫੇਰ ਫੇਰ ਕੇ ਉਹ ਸਿਰ ਭਰ ਦੇ ਖੜੇ ਰਹੇ ਨੇ ਕਈ ਕਈ ਕਸਤੇ ਇਹ ਪੁੱਠੇ ਕਰਦੇ ਨੇ ਲੋਕ ਧਰਮ ਦੇ ਨਾਲ ਤੇ ਕਿਰਪਾ ਤੋਂ ਬਿਨੋ ਲਈ ਪ੍ਰਾਪਤੀ ਉਹਨਾਂ ਦੇ ਕਿਰਪਾ ਨਹੀਂ ਹੋਈ ਪੁੱਠੇ ਰਾ ਪਏ ਨੇ ਜੀ ਤੇ ਡੇੜਾ ਨਹੀਂ ਪਏ ਕਿਸੇ ਤੇ ਡੇੜਾ ਪਾਏ ਨਹੀਂ ਕਿਸੇ ਦੇ ਇਹ ਕੋਈ ਕਹਿੰਦਾ ਉਹਦੀ ਗੱਲ ਸੁਣਦੇ ਹੀ ਨਹੀਂ ਅਜੋ ਠੀਕ ਹੈ ਜੀ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੇ ਭਾਇ ਖੁਆਇ ਜਿਆਦੇ ਤਾਂ ਲੋਭ ਭੁੱਖ ਵਾਲੇ ਅੰਦਰ ਜੋ ਭੁੱਖ ਤਾਂ ਦੂਜੀ ਹੈ ਬਾਹਰ ਦੇ ਸ਼ਰੀਰ ਦੀ ਭੁੱਖ ਹੈ ਉਹ ਖੁਆਏ ਸੁਖ ਨੂੰ ਗਏ ਆਇਆ ਦੇ ਜੰਗਤ ਖੋਏ ਹੋਏ ਲਿਆਦਾ ਜੇ ਉਹਨਾਂ ਦਾ ਰਾਹ ਲੱਭਿਆ ਹੀ ਨਹੀਂ ਠੀਕ ਹੈ ਹੁਣ ਉਹ ਨਹੀਂ ਜੋ ਰਸਤਾ ਬਿਲਿਆ ਉਹ ਖੋਏ ਹੋਏ ਨੇ ਖੋਏ ਹੋਏ ਨੇ ਜੰਮਣ ਮਰਨ ਚੁੱਕੇ ਹੀ ਹਉਮੈ ਵਿੱਚ ਦੁੱਖ ਪਾਏ ਜਮਾ ਬਨਣਾ ਦਾ ਚੁੱਪਿਆ ਨਹੀਂ ਬੰਦ ਨਹੀਂ ਹੋਣਾ ਉਹਦੇ ਵਿੱਚ ਰਹਿਣਗੇ ਦੁਖੀ ਰਹਿਣਗੇ ਸੁਖ ਪਾਉਣੇ ਰਹਿਣਗੇ ਉਹਦੇ ਵਿੱਚ ਹੀ ਦੁੱਖ ਪ੍ਰਾਪਤ ਕਰਦੇ ਰਹਿਣਗੇ ਜਿਨਾ ਸੰਤ ਗੁਰ ਸਿਉ ਚਿਤ ਲਾਇਆ ਸੁਖ ਖਾਲੀ ਕੋਈ ਨਹੀਂ ਜਿਹੜਾ ਸਤਗੁਰੂ ਨਾਲ ਚਿਤ ਲਾਇਆ ਉਹਨਾਂ ਜਿਹੜੇ ਇੱਕ ਵੀ ਦਿਖਾਉ ਖਾਲੀ ਸਾਰਿਆਂ ਦੇ ਹਿਲਤੇ ਭਰਪੂਰ ਨੇ ਪਰ ਪੂਰੇ ਕੀਤੇ ਤਾਂ ਇਹ ਨਹੀਂ ਦਾ ਸਤਗੁਰੂ ਨਾਲ ਜਿਸ ਲੱਗਿਆ ਹੋਇਆ ਉਹਨਾਂ ਨਾ ਅਸ਼ਾਂਤ ਦਿਖਾਉਗੇ ਜਿਹੜਾ ਸ਼ਾਂਤ ਨਾ ਹੋਵੇਈ ਨਾ ਉਹ ਦੁੱਖ ਸਹਾਂਇ ਜਦ ਜੰਮ ਦੀ ਜਦੋਂ ਜਮੋਂ ਨਾਲਵਦਾ ਹੀ ਨਹੀਂ ਹੈ। ਨਾਲਵੇ ਦੀ ਸਬਦਾ ਠੀਕ ਹੈ ਜੀ। ਨਾ ਉਹ ਦੁੱਖ ਸੁਹਾਏ ਨਾਲਵਣਾ ਨੂੰ ਦੁੱਖ ਜਦੋਂ ਪੈਂਦਾ ਜੱਪ ਦੇ ਡੰਡੇ ਦਾ। ਆਹ ਦੁੱਖ ਕਦੇ ਸਹਿਣਗੇ ਉਹ ਜਮ ਮਾਰ ਨਹੀਂ ਪੈਂਦੀ ਹਾਂ ਜੱਪ ਦਾ ਦੁੱਖ, ਕਿਆ ਮਾਣੋਂ ਦੁੱਖ ਦੇਈ ਨਹੀਂ ਸਕਦਾ। ਸਾਰੀ ਦੁੱਖ ਸੁੱਖ ਦੇ ਸਕਦਾ ਬਰਾਬਰ ਸਮਝਦੇ ਨੇ। ਲੈ ਜਿਹੜੇ ਦੇ ਦੇ ਤੇ। ਦੁੱਖ ਦੁੱਖ ਨਹੀਂ ਸੁੱਖ ਤੋਂ ਖੁਦ ਹੀ ਠੀਕ ਹੈ ਜੀ ਨਾਨਕ ਗੁਰਮੁਖੀ ਉੱਭਰੇ ਸੱਚੇ ਸ਼ਬਦ ਸਮਾਏ ਗੁਰਮੁਖੀ ਉੱਭਰੇ ਸੱਚੇ ਸੱਚ ਦੇ ਸ਼ਬਦ ਗੁਰਮੁਖ ਨੂੰ ਉੱਪਰ ਉੱਠਿਆ ਹੈ ਜਪ ਦੇ ਮਾਰਗ ਤੋਂ ਉੱਪਰ ਉੱਠਦੇ ਸੱਚੇ ਸ਼ਬਦ ਸਮਾਏ ਸੱਚੇ ਸ਼ਬਦ ਵਿੱਚ ਸੁਭਾਗੇ ਸੰਸਾਰ ਤੋਂ ਉੱਪਰ ਉੱਠ ਕੇ ਸੱਚੇ ਸ਼ਬਦ ਵਿੱਚ ਸਮਾਏ ਹੋਏ ਗੁਰਮੁਖ ਨੂੰ ਟਾੜੀ ਤਿਸ ਨੂੰ ਆਖੀ ਐ ਜੇ ਖਸਮੇ ਧਰੇ ਪਿਆਰ ਦਰ ਖੜਾ ਏਵਾ ਕਰੇ ਗੁਰ ਸ਼ਬਦੀ ਵਿਚਾਰ ਕੋਈ ਟਾੜੀ ਵੀ ਨਾ ਹੀ ਨੀ ਆਇਆ ਜਾਇਆ ਤੁਹਾਡੀ ਆ ਲਿਖ ਦਿੱਤਾ ਗੁਰਬਾਣੀ ਦੇ ਜਿਆਦਾ ਟਾੜੀਆਂ ਨੂੰ ਪੜਿਆ ਨਹੀਂ ਉਹਨਾਂ ਨੇ ਪਤਾ ਨਹੀਂ ਲੱਗਿਆ ਬਈ ਵੀ ਅਜੇ ਦੇਖੇ ਇਹਦਾ ਕੋਈ ਟਾੜੀ ਵੀ ਨਾ ਹੀ ਹੈ ਗੁਰਬਾਨ ਦਸੀਗਾ ਟਾੜੀ ਉਦੋਂ ਕਿਆ ਭਗਤ ਟਾੜੀ ਦੇ ਹੋਰ ਤਾਂ ਕੋਈ ਵੀ ਜਬੀ ਹੋਈ ਚ ਟਾੜੀ ਟਾਡੀ ਤੇਸ ਨੂੰ ਆਖੀਏ ਟਾਡੀ ਕੀ ਨੂੰ ਆਖਣਾ ਚਾਹੀਦਾ ਜੋ ਖਸਬੇ ਤੇ ਪਿਆਰ ਜਿਹਦਾ ਸੱਚ ਨੂੰ ਪਿਆਰ ਹੋਵੇ ਇਹਦਾ ਢਾਡੀ ਤੋਂ ਤਾਂ ਪਿਆਰ ਕਰਦੇ ਸੀ ਬੜਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਟਾਈਮ ਲੱਗਦੀ ਆ ਤੁਹਾਨੂੰ ਡਿੱਡ ਵਜਾਉਂਦੇ ਨੇ ਅੱਛਾ ਜੀ ਹਾਂ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਕਿਹੜਾ ਅਸਲੀ ਸਾਡੀ ਹੈ ਹਾਂਜੀ ਉਹਦਾ ਉਹਦੇ ਦਰ ਤੇ ਖੜਾ ਰਹਿੰਦਾ ਸਭ ਤੋਂ ਪਰੇ ਜਾਂਦਾ ਨਹੀਂ ਦਰ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ ਕਰਦਾ ਰਹਿੰਦਾ ਜਾਂ ਉਹਦੇ ਤੇ ਸੇਵਾ ਕਰਦਾ ਖੜਾ ਇਹ ਸਾਡੀ ਕਦੇ ਕਰਦੇ ਨਾ ਸੇਵਾ ਇਹ ਤਾਂ ਸਾਖੀਆਂ ਸੁਣਉਂਦੇ ਉਹ ਵੀ ਸਾਰੀ ਝੂਠੀ ਹੈ ਤੇ ਸਾਖ ਨੇ ਉਹ ਵੀ ਸਾਰਾ ਝੂਠਾ ਰੰਝ ਕੇ ਯੂਰ ਬੋਲਦੇ ਨੇ ਹਾਂਜੀ ਸਾਡੀ ਦਰਕਰ ਪਾਈ ਸੀ ਸੱਚ ਰੱਖਿਆ ਔਰ ਧਾਰ ਸਾਡੀ ਤੋਂ ਉਹ ਹੈ ਜਿਹੜਾ ਦਰਕਰ ਪਾਈ ਸੀ ਜਿਹੜਾ ਆਪਣਾ ਮੇਜ ਘਰ ਪਹੁੰਚ ਗਿਆ ਉਹ ਸਾਡੀ ਹੈ ਧਾਰ ਔਰ ਘਰ ਨੂੰ ਪ੍ਰਾਪਤੀ ਹੋਗੀ ਸੱਚ ਰੱਖਿਆ ਔਰ ਅਭਿਡੇ ਡਬਜਾਉਣੇ ਵਾਲੇ ਸਾਰੇ ਹੀ ਨੇ। ਹਰਾਂ ਕੀ ਨੇ। ਹਾਂਜੀ ਟਾਡੀ ਦਾ ਮਹਿਲ ਅਗਲਾ ਹਰਕੇ ਨਾਏ ਪਿਆਰ ਟਾਡੀ ਦੀ ਸੇਵਾ ਚੱਕਰੀ ਹਰ ਜਪ ਹਰ ਨਿਸ਼ਤਾਰ। ਟਾਡੀ ਦਾ ਮਹਲਾਤਲਾ ਟਾਡੀ ਦਾ ਮਹਿਲ ਅੱਜ ਚ। ਉੱਥਾ ਮਹਿਲ ਤੇ ਟਾਡੀ ਦਾ ਉਹਦਾ ਅੱਗੇ ਹੈ ਉਹਦਾ। ਠੀਕ ਹੈ। ਪਰ ਲੋਕ ਦੇ ਦਾ। ਟਾਡੀ ਦਾ ਮਹਲਾ ਅਗਲਾ। ਹਰ ਦੇ ਨਾਲ ਪਿਆਰ ਕਿਉਂਦਾ ਹਰ ਨਾਲ ਪਿਆਰ ਹੁੰਦਾ ਜਿੱਤੇ ਹਰ ਬੈਠਾ ਉਸ ਮਹਲ ਦੇ ਵਿੱਚ ਜਾਣਾ ਉਹ ਟਾਡੀ ਉਹ ਮਾਇ ਲੱਗੇ ਹੈ ਟਾਡੀ ਕੀ ਸੇਵਾ ਫਰੂਦੀ ਰਜਾ ਵਿੱਚ ਜਿਹੜੀਆਂ ਦੀ ਚੱਲਦਾ ਢਾਡੀ ਰਹੀ ਹੈ। ਕਿਆ ਕਰ ਦੁਨੀਆ ਉਹ? ਕਿ ਫਰੂਦੀ ਰਜਾ ਚਲੀ ਚੱਲਦਾ। ਇਹ ਚੱਲਦੇ ਨੇ ਖਾਲਸਾ ਵਾਲੇ ਨੁਕਸਾਨ ਢਾਡੀਆਂ ਨੇ ਕੀਤਾ ਗੁਰਬੰਧਾ ਕਿਸੇ ਨੇ ਨਹੀਂ ਕੀਤਾ। ਹਰ ਜੱਪੀ ਹਰ ਨਿਸਤਾਰ। ਹਰ ਜੱਪੀ ਹਰ ਨਿਸਤਾਰ ਨੇ ਆਹ ਉਹਨੂੰ ਪਤਾ ਲੱਗ ਗਿਆ ਸਾਚਾ ਤੂੰ ਉੜਦਾ ਦਿਸਾਰਾ ਹੋ ਗਿਆ ਖਰੇ ਖੋਤੇ ਦੀ ਪਛਾਣ ਹੋ ਗਈ